ਸ਼ੇ ਮਹਲਾ ਮਹੱਲਾ ਪੰਜਵਾਂ ਢੀੜੋਂ ਕੀਤੀਨ ਸਭ ਰੱਖੇ ਕੁਟੰਬੈ ਨਾਲ ਕਾਰਜ ਆਪ ਸਵਾਰੀਨ ਸੋਭਰਮ ਸਰਾ ਸੰਭਾਲ ਯਾਨਾ ਦੇ ਪੀੜੀ ਫਾਈ ਪਈ ਨਾ ਬੰਦ ਕੇ ਸਾਰਿਆਂ ਨੂੰ ਅੱਛਾ ਜੀ ਛੱਡ ਕੇ ਰੱਖਦਾ ਹੁਕਮ ਜ਼ਿਆਦਾ ਟੈਟ ਕੀਤੇ ਤੇ ਨੂੰ ਥੋੜੀ ਮੁਖਲਾਈ ਕੀਤੀ ਕਹਿੰਦਾ ਮੈਨੂੰ ਤਾਂ ਘੱਟੋ ਘੱਟ ਥੋੜਾ ਮੇਰਾ ਗੜ ਮੋਕਲਾ ਹੋ ਗਿਆ ਜਿੰਨਾ ਜਿਹੜਾ ਹੁਕਮ ਮੰਨਦਾ ਉਹਦਾ ਗਲ ਮੋਕਲਾ ਹੋ ਜਾਂਦਾ ਹੈ ਪੂਰੀ ਪੀੜ ਘਟ ਜਾਂਦੀ ਹੈ ਸਭ ਰੱਖੇ कुटुंब ਦੇ ਸਾਰਿਆਂ ਨੂੰ कुटुंब ਦੇ ਨਾਲ ਰੱਖਣਾ ਚਾਹੀਓ ਗਲ ਘੁੱਟ ਕੇ ਰੱਖੇ ਚਾਹੇ ਖੁੱਲਾ ਛੱਡ ਕੇ ਰੱਖੇ ਰੱਖਣੇ ਸਾਰੇ ਕਾਬੂਜ ਨੇ ਜਿਹੜੇ ਬੇਕਾਬੂ ਜਾਂਦਾ ਉਹਨੇ ਨੇ ਜਿਆਦਾ ਟੈਟ ਕਰ ਦਿੰਦੇ ਰਸਾ ਜਿਹੜੇ ਘਟ ਹੁੰਦੇ ਨੇ ਉਹਦਾ ਰਸਾ ਮੋਕਲਾ ਰੱਖ ਲੈਂਦੇ ਨੇ ਉਹਨਾਂ ਨੂੰ ਖਤਰਾ ਨਹੀਂ ਹੁੰਦਾ ਹੁਣ ਨੂੰ ਇਕੱਠਾ ਕਰਨ ਵਾਸਤੇ ਹੁਕਮ ਰੱਖਿਆ ਹੋਇਆ ਹਾਂਜੀ ਠੀਕ ਹੈ ਵੀ ਜਿਹੜੇ ਕੈਦੀ ਜ਼ਿਆਦਾ ਖਰੂ ਪਾਉਂਦੇ ਆ ਉਹਨਾਂ ਨੂੰ ਫਿਰ ਉਹ ਬੇੜੀ ਵੀ ਲਾ ਦਿੰਦੇ ਹਾਂ ਹਾਂਜੀ ਜਿਹੜੇ ਫਿਰ ਠੀਕ ਹੈ ਉਹਨਾਂ ਨੂੰ ਉਹਨਾਂ ਦੀਆਂ ਹੱਤਕੜੀਆਂ ਖੋਲ ਦਿੰਦੇ ਹਾਂ ਵੀ ਬਣਾ ਦਿੰਦੇ ਨੇ ਉਹਨਾਂ ਨੂੰ ਦੀ ਗੱਲ ਹੈ ਜੀ ਨਾ ਨਾ ਪਪਾ ਸਾਹਿਬ ਸੁੱਕਾ ਇੱਕੋ ਹੀ ਹੈ ਕੁਟੰਬ ਸਾਰਾ ਅੱਛਾ ਜਿਹੜੇ ਬਾਗੀ ਹੁੰਦੇ ਨੇ ਕਟਬ ਦੇ ਨਾਲ ਹੀ ਰਹਿਣਾ ਚਾਹੁੰਦੇ ਬੈਰਪਰੂਫ ਕਰਨਾ ਕਟਬ ਦੇ ਨਾਲ ਹੀ ਰਹਿਣਾ ਜਿਹਨੇ ਬੈਰਪਰੂਫ ਕਰਨਾ ਘਰ ਦੇ ਨਾਲੇ ਲੜਨਾ ਜਿਹਨੇ ਬੈਰਪਰੂਫ ਕਰਨਾ ਉਹ ਕਟਬ ਦੇ ਨਾਲ ਲੈਣਾ ਦੇ ਨੇ ਠੀਕ ਹੈ ਜੀ ਹਾਂ ਕਾਰਜ ਆਪ ਸਵਾਰੀਆਂ ਸੋ ਪ੍ਰਭ ਸਦਾ ਸੰਭਾਲ ਉਹ ਠਾਇਆ ਕਾਰਜ ਸਵਾਰ ਤਾਇਆ ਕੁਝ ਵਿਗਾੜਦਾ ਨਹੀਂ ਜੇ ਆਪਾਂ ਰਸਤਾ ਟਾਇਟ ਵੀ ਕਰ ਦੇਣਾ ਤਾਂ ਫਾਇਦਾ ਉਹਦਾ ਹੀ ਹੈ ਜੇ ਕੋਟਕੇ ਬੱਚੇ ਦਾ ਹੱਥ ਫੜਿਆ ਹੈ ਨਾ ਆਪਾਂ ਨੇ ਤਾਂ ਫੜਿਆ ਹੈ ਕਿ ਉਹ ਛਲਾ ਕੇ ਤੇ ਭੱਜ ਕੇ ਨਾ ਚਲਾ ਜਾਵੇ ਕੋਈ ਸੱਟ ਖਾ ਸੋ ਪ੍ਰਭ ਸਦਾ ਸੰਭਾਲ ਇੱਥੇ ਸੰਭਾਲ ਰੱਖ ਉਹਦੀ ਸੋਜੀ ਰੱਖ ਜਿੱਤ ਵਿੱਚ ਉਹਦੀ ਯਾਦ ਰੱਖ ਠੀਕ ਹੈ ਜੀ ਪ੍ਰਭ ਮਾਤ ਪਿਤਾ ਕੰਠ ਲਾਈ ਦਾ ਲੋਹੜੇ ਬਾਲਕ ਪਾਲ ਦਿਆਲ होए सब जी जंत्र हर नानक नजर निहाल आज बेटा बांको कंठ लाके रख दे गल लाके रख दे सोड़े बालक बालक छोटे मुंडे जवें बालक पाणी दे ने छोटे छोटे बच्चे पाणी दे नी है बड़े चक के कर लाके रख दे ने इन्हें पालदा हो हां जी दयाल होए सब जी जंत्र ਸਾਰੇ ਜੇ ਚੀਜ਼ਾਂ ਚੱਲ ਨੇ ਸਾਰਿਆਂ ਤੇ ਇੱਕ ਰੱਬ ਦੀ ਸ੍ਰਿਸ਼ਟੀ ਰੱਜ ਰਿਹਾ ਹੈ ਸਾਰਿਆਂ ਨੂੰ ਪਾਲਦਾ ਹੈ ਕਿਤੇ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀ ਆ ਪੁੱਤਰੇ ਮਨ ਕੀ ਭੁੱਖ ਛੱਡ ਕੇ ਹੋਰ ਜੇ ਕੋਈ ਹੋਰ ਚੀਜ਼ ਮੰਗੀ ਜੇ ਉਹ ਤਾਂ ਸਿਰ ਦੁੱਖਾਂ ਦੇ ਦੁੱਖ ਪਹਿਲੇ ਦੁੱਖਾਂ 'ਚ ਖੜੇ ਹੋਰ ਦੁੱਖ ਦੁੱਖਾਂ ਦੀ ਪੜਨ ਹੋਰ ਸਕਦਾ ਤਾਂ ਜੀ ਤੇਰੇ ਚਰਣਾ ਤੋਂ ਸਵਾਹ ਹੋਰ ਕੁਝ ਮੰਗਣਾ ਤੇਰੀ ਨਿਰਣਤਾ ਤੋਂ ਸਵਾਹ ਹੋਰ ਕੁਝ ਮੰਗਣਾ ਤੇਰੇ ਭਲਾਪ ਸੰਜੋਗ ਤੋਂ ਬਿਨਾਂ ਹੋਰ ਕੁਝ ਮੰਗਣਾ ਦੁੱਖਾਂ ਦੇ ਸਿਰਫ ਉਹ ਦੁੱਖ ਨੇ ਦੁਖਾੜੀ ਪੰਡ ਸੰਤੋਖੀ اے ਸੰਤੋਖ ਆਪ ਹੈ ਸੰਗੋ ਸੰਤੋਖਿਆ اے ਸੰਤੋਖਿਆ ਸੰਤੋਖੀ ਤੂੰ ਮੈਨੂੰ ਨਾਮ ਦੇ ਤੋ ਨਾਮ ਸੰਤੋਖੀਆਂ ਨੂੰ ਮਿਲਦਾ ਪਹਿਲਾਂ ਜਿਹੜੇ ਸੰਤੋਖੀ ਆਲਰੇਡੀ ਨੇ ਉਹਨਾਂ ਨੂੰ ਮਿਲਦਾ ਹੈ ਸੱਚ ਮੈਂ ਲਿਆ ਸੰਤੋਖੀਆਂ ਸੱਚ ਸੰਤੋਖੀਆਂ ਨੂੰ ਮਿਲਦਾ ਹੋਰ ਕਿਸਨ ਨੂੰ ਮਿਲਦਾ ਸੰਤੋਖੀ ਹੋਇਆ ਹੁਣ ਉਹ ਤਾਂ ਨਹੀਂ ਦਾ ਮਿਲਣਾ ਮੇਰੇ ਮਨ ਦੀ ਭੁੱਖ ਵੀ ਉਤਲੇ ਤੂੰ ਮੈਨੂੰ ਵੀ ਨਾ ਤੇਡੂ ਕੋ ਖਾਇਨੀ ਨਾ ਤੇਰੇ ਮਨ ਨੂੰ ਮੇਰੇ ਮਨ ਨੂੰ ਹੈ ਇਹ ਸੰਤੋਖੀ ਤੋਂ ਨਾ ਮੰਗਿਆ ਜਾ ਰਹੇ ਹਾਂ ਹਾਂ ਇਹਦਾ ਮੂਲ ਸੰਤੋਖੀ ਅੱਧਾ ਸੰਤੋਖੀ ਹੈ ਅੱਦਾ ਉਹਨੂੰ ਗੁੰਮੀ ਨਾਲ ਜਿਹੜਾ ਇਹ ਬੇਸੰਤੋਖੀ ਹੈ ਹਾਂਜੀ ਗੁਰ ਵਣ ਤੈਣ ਹਰਿਆ ਕੀਤਿਆਂ ਨਾਨਕ ਕਿਆ ਮਨੁਖ ਗੁਰ ਵੰਤਨ ਹਰਿਆ ਕੀਤਿਆਂ ਸਤਗੁਰ ਨੇ ਤਾਂ ਬੰਤਨ ਸਾਰੇ ਹਰਾ ਕੀਤਾ ਹੋਇਆ ਨਾਨਕ ਕਿਆ ਮਨੁਖ ਨਾਨਕ ਇਹਨਾਂ ਮਨੁਖ ਕੀ ਕਰ ਲੂਗਾ ਹਰਾ ਮਨੁਖ ਤਾਂ ਕੁਝ ਨਹੀਂ ਆਪਣੇ ਆਪ ਨੂੰ ਹਰਾ ਨਹੀਂ ਰੱਖ ਸਕਦਾ ਇਹ ਤਾਂ ਮਨੁਖ ਆਪਣੇ ਸਰੀਰ ਨੂੰ ਹਰਾ ਭਰਾ ਨਹੀਂ ਰੱਖ ਸਕਦਾ ਉਹ ਵੀ ਜਿਹੜਾ ਇਹਦੇ ਅੰਦਰ ਇਹਦਾ ਮੂਡ ਉਹਦੇ ਵਸਦੀ ਗੱਲ ਦੂਜੇ ਦੇ ਨੂੰ ਕੀ ਕਰ ਸਕਦਾ ਮੈਨੂੰ ਹਾਂਜੀ ਸੋ ਐਸਾ ਦਾਤਾਰ ਮਨੋਂ ਨਾ ਵਿਸਰੇ ਘੜੀ ਨਾ ਮੋਹਤ ਚੱਸਾ ਨਾ ਸਰਹਿ ਵੇ ਜਦ ਨਾ ਵਿਸਰੇ ਕਹਿੰਦੇ ਮੇਰੇ ਮਨੋਂ ਦਾ ਵਿਸਰਦਾ ਹੈ ਭਾਈ ਘੜੀ ਦਾ ਮੋਹਤ ਚੱਸਾ ਇਸ ਬਿਨ ਨਾ ਸਰਹਿ ਇੱਕ ਸਕਿੰਟ ਘੜੀ ਵਾਸਤੇ ਮਿੰਟ ਕੀ ਸਕਿੰਟ ਵਾਸਤੇ ਵੀ ਮੇਰਾ ਸਰਦਾ ਨਹੀਂ ਉਹ ਤੇ ਕਿਸੇ ਰabri ਸਰਦਾ ਅਸਲ ਚੋਤੇ ਲਾਪਰਵਾਹੀ ਹੈ ਇਸੇ ਦੀ ਜਿਹਦੇ ਬਣਾ ਸਾੜੇ ਸਕਦਾ ਬਿਨਾ ਚਾਹੁੰਦੇ ਆ ਹੈ ਸਾਰਨਾ ਚਾਹੁੰਦੇ ਆ ਸਰਦਾ ਹੈ ਜੀ ਜਿੱਦਣ ਉਹਦੇ ਨਾਲ ਖਲਾਬ ਹੋ ਗਿਆ ਸਾਰੀਆਂ ਅੱਛਾ ਪੂਰੀਆਂ ਹੋ ਜਾਣਗੀਆਂ ਸਭੇ ਅੱਛਾ ਪੂਰੀਆਂ ਜਾਂ ਪਾਇਆ ਗਬ ਉਪਾਰਾ ਹਾਂਜੀ ਅੰਤਰ ਬਾਹਰ ਸੰਗੀ ਕਿਆ ਕੋ ਲੁੱਕ ਕਰੈ ਜਿਸ ਪੱਤਰ ਰੱਖੈ ਆਪ ਸੋ ਭਵਜਲ ਤਰੈ ਉਹ ਦਰਵਾੜ ਫੇ ਸੁਗੇ ਆਓ ਉਹ ਨਾਲ ਹੀ ਐ ਜੋਤ ਐ ਉਹ ਉਹ ਸਰੀਰ ਤਾਂ ਉਹਦੇ ਵਿੱਚ ਹੀ ਐ ਉਹ ਦੇ ਚੇਤਨ ਦੀ ਸਰੀਰ ਹੁੰਦਾ ਦਾ ਸਰੀਰ ਕੈਦ ਕੀਤਾ ਬਸ ਵਿੱਚ ਕੀਤਾ ਹੋਇਆ ਬਸ ਫਿਰ ਜੀਵ ਕਲਣ ਵਾਲਾ ਵੱਡਾ ਹੁੰਦਾ ਜਿਵੇਂ ਹੱਥ ਮੁਠੀ ਵਿੱਚੀਏ ਤੇ ਪਕੜਿਆ ਹੈ ਸਰੀਰ ਉਹਦੀ ਪਕੜ ਚ ਜਕੜ ਇਹ ਦੀ ਜਖੜ ਚੋਰ ਨਹੀਂ ਹੈ ਅੰਦਰ ਬਾਹਰ ਸੰਭ ਕਿ ਆ ਕੋ ਲੁਕ ਕਰੇ ਕਿੱਥੇ ਲੁਕ ਚੋਰੀ ਨਹੀਂ ਕੀਤੀ ਜਾ ਸਕਦੀ ਕੋਈ ਬੁਰਾ ਕੰਮ ਹੋਵੇ ਚੋਰੀ ਲੁਕਾ ਕੇ ਅਸੀਂ ਕਰ ਲਈਏ ਨਹੀਂ ਹੋ ਸਕਦਾ ਅੰਦਰ ਬਾਹਰ ਸਾਡੇ ਨਾਲ ਜਿਸ ਪੱਤ ਰੱਖੇ ਆਪ ਸੁਭਾਵਜਲ ਕਰ ਜਿਹਦੀ ਉਹ ਪੱਤ ਰੱਖਦਾ ਹੈ ਉਲਟੇ ਖਫਤੇ ਵਿਚਾਰ ਦੇ ਰੱਖਦਾ ਉਹ ਪਵਜਨ ਤਰਿਆ ਰਹਿੰਦਾ ਉਹ ਆਪ ਜਿਹੜਾ ਤਰਿਆ ਹੈ ਸਤਿਗੁਰ ਪਵਜਤ ਕਰਿਆ ਰਹਿੰਦਾ ਹੈ ਜਿਹੜਾ ਉਹਦੇ ਨਾਲ ਜੁੜ ਕੇ ਰਹਿੰਦਾ ਹਾਂਜੀ ਸਗਤ ਗਿਆਨੀ ਤਪਾ ਜਿਸ ਕਿਰਪਾ ਕਰੇ ਸੋ ਪੂਰਾ ਪ੍ਰਦਾਨ ਜਿਸ ਹੋਵੇ ਤਪ ਕਰਨ ਵਾਲਾ ਤਪਾ ਹੋਵੇ ਜਿਸ ਕਿਰਪਾ ਕਰੇ ਜਿਸ ਤੇ ਕਿਰਪਾ ਕਰ ਦਵੇ ਸੋ ਪੂਰਾ ਪ੍ਰਦਾਨ ਉਹ ਪੂਰਾ ਪ੍ਰਦਾਨ ਹੋ ਜਾਂਦਾ ਜਿਸ ਨੂੰ ਬਲ ਤਰਿਆ ਜਿਸ ਨੂੰ ਬੁੱਧਵਾਲ ਬਖਸ਼ ਦਵੇ ਜਿਹਦੇ ਅੰਦਰ ਬੁੱਧਵਲ ਦਾ ਪ੍ਰਵੇਸ਼ ਹੋ ਜਵੇ ਜਿਹੜਾ ਬੁੱਧਵਲ ਧਾਰਨ ਕਰ ਲਵੇ ਉਹ ਚਾਹੇ ਪਹਿਲਾਂ ਤਪ ਕਰਦਾ ਹੋਵੇ ਚਾਹੇ ਗਿਆਨੀ ਹੋਵੇ ਪਹਿਲੇ ਉਹ ਤੋਂ ਪਹਿਲਾਂ ਚਾਹੇ ਭਗਤੀ ਕਰਦਾ ਹੋਵੇ ਕੁਝ ਵੀ ਕਰਦਾ ਹੋਵੇ ਜਦ ਪੂਰਨ ਬੁੱਧ ਆ ਜਾਂਦੀ ਹੈ ਜਦ विवेक ਆ ਜਾਂਦੀ ਹੈ ਜਦ विवेक ਆ ਜਾਂਦਾ ਹੈ ਫਿਰ ਇੱਕੋ ਹੋ ਜਾਂਦੇ ਜਾ ਕੇ ਉੱਥੇ ਹਾਂਜੀ ਜਿਸਨ ਜਰਾਈ ਆਪ ਸੋਹੀ ਅਜਰ ਜਰੈ ਇਸ ਹੀ ਮਿਲਿਆ ਸੱਚ ਮੰਤਰ ਗੁਰ ਮੰਤਰ ਆ ਜਿਹੜਾ ਹੈ ਨਾ ਖਜ਼ਾਨਾ ਨਾਮ ਦਾ ਇਹ ਆ ਜਾ ਰਿਹਾ ਹੈ ਇਹ ਖਜ਼ਾਨਾ ਇਹ ਜਰਾ ਰੋਗ ਤੋਂ ਪਰੇ ਹੈ ਇਹ ਤਾਂ ਵੀ ਜਾ ਜਿਹੜੇ ਆਦਮੀ ਕੋਲ ਹੋਵੇ ਉਹਨੂੰ ਵੀ ਮੁਸ਼ਕਲ ਆਏ ਨਾ ਹੋਵੇ ਖਤਰਾ ਬਹੁਤ ਬੜਾ ਜਿਹੜਾ ਨੂੰ ਗਰਦਾਸ਼ ਕਰਨ ਦੇ ਬੰਦ ਰਿਵਰਟ ਦੇ ਵਿੱਚ ਆਜ ਵੀ ਪੂਰੀ ਚ ਹੋ ਹੀ ਸਕਦਾ ਹੈ ਸਮੁੰਦਰ ਜੰਗਲ ਦਾ ਸਾਰੇ ਤੂਫਾਨਾਂ ਨੂੰ ਦੀਵੇ ਤੋਂ ਹੈ ਸਮੁੰਦਰ ਉਹਦਾ ਤਾਂ ਨਾ ਦੀਵੇ ਚਪ ਤਾਂ ਦੀਵੀ ਜਗਾ ਸਰ ਗੋੜੇ ਗੋੜੇ ਤੂਫਾਨ ਆਉਂਦੇ ਇਹਨੂੰ ਜਿਹੜਾ ਸਭ ਦੇ ਵਿੱਚ ਹੀ ਜਾ ਸਕਦਾ ਇਹਨੂੰ ਉਤਲੀ ਅਵਸਥਾ ਵਾਲਾ ਇਹਨੂੰ ਜਲਦੀ ਸੁ ਉਹ ਮੇਰੀ ਅਵਸਥਾ ਵਾਲਾ ਤਾਂ ਜਰੇ ਨਹੀਂ ਸਕਦਾ ਇਹਨੂੰ ਉਹ ਤਾਂ ਪਹਿਲਾਂ ਹੀ ਉੱਛੜ ਜਾਂਦੀ ਹੈ ਚਪੜੀ ਤੁਸੀਂ ਮਿਹਰ ਸਾਚੇ ਮੰਤਰ ਗੁਰ ਮੰਨ ਕਰਾ ਬਸ ਉਸੇ ਤੋਂ ਗੁਰ ਮੰਤਰ ਨੂੰ ਮੰਨ ਕਰਕੇ ਬੰਦੇ ਮਨ ਬੰਦੇ ਨਾਲੇ ਨੂੰ ਸਿਆਲੀ ਮਨ ਨਹੀਂ ਤਰ ਹੈ ਮਨ ਵਿੱਚ ਧਾਲਣ ਕੀਤਾ ਇਹਨੂੰ ਕੁਰਬਾਨੀ ਨੂੰ ਪਰ ਵਿੱਚ ਧਰਿਆ ਹੈ ਕਹਿੰਦੀ ਬੰਦੇ ਹੈ ਜਿਹਨਾਂ ਬੰਨਣ ਵਾਲਿਆਂ ਨੂੰ ਮਨ ਚ ਧਾਲਣਾ ਵੱਲ ਬੰਨ ਨੇ ਕੁਰਬਾਨੀ ਨੂੰ ਸੱਤ ਸੱਤ ਕਰਕੇ ਮੰਨਿਆ ਉਹਨਾਂ ਨੂੰ ਸੱਚ ਮਿਲਦਾ ਹੈ ਸੱਚ ਨਹੀਂ ਮਿਲਦਾ ਆਦ ਵਿਚਾਲੇ ਨੇ ਜਿਹੜੇ ਬੰਨਣ ਚ ਉਹਨਾਂ ਨੂੰ ਨਹੀਂ ਮਿਲਦਾ ਸੱਚ ਜਿਸ ਵੇਸ ਜਿਹਨੇ ਉਸੇ ਨੂੰ ਸੱਚ ਮਿਲਿਆ ਚਰਾ ਵੀ ਚਰੇ ਹੈ ਵੀ ਜਿਸ ਦੇ ਗੁਰ ਦੇ ਵਿੱਚ ਕਿਸੇ ਕਰ ਸੁਣਤੀ ਕੁਝਾਇੇ ਸ਼ੇਰੀ। ਠੀਕ ਹੈ ਜੀ।